जी ਸੰਗ ਜੀਓ ਤਹਾਂ ਬੈਕੁੰਠ ਜੈ ਕੀਰਤਨ तेरा ਸਹਬਾ ਦੇ ਮਾਰਿ ਦੇ ਅਨਸਾਰ ਇਹ ਸਤ ਹੈ ਜਿੱਥੇ ਕੀਰਤਨ ਹੁੰਦਾ ਹੈ ਪ੍ਰਭੂ ਦੀ ਕੀਰਤੀ ਹੁੰਦੀ ਹੈ ਉਥੇ ਸਾਧ ਸੰਗ ਉਸੇ ਨੂੰ ਹੀ ਸਾਧ ਸੰਗ ਕਹਿੰਦੇ ਹਨ ਉਹ ਜਦੋਂ ਰਾਗਾਂ ਦੇ ਅੰਦਰ ਸੋਜੀਵਾਨ ਕੀਰਤਨ ਕਰਦੇ ਹਨ ਤਾਂ ਮੈਂ ਤਾਂ ਕਹਿੰਦਾ ਬਖੰਡ ਤੋਂ ਵੀ ਕੋ ਉੱਪਰ ਦੀ ਜਗ੍ਹਾ ਹੈ ਸਿੱਧੇ ਸ਼ਬਦਾਂ ਦੇ ਨਾਲ ਵੀ ਸਿੱਧੀਆਂ ਧਾਰਨਾ ਨਾਲ ਜਿਸəkਤੇ ਸ਼ਬਦ ਪੜਦੇ ਹਾਂ ਤੇ ਬਖੰਡੋ ਉਹ ਵੀ ਵੜ ਜਾਂਦਾ ਹੈ ਪਰ ਜੋ ਕੀਰਤਨ ਰਾਗਾਂ ਦੇ ਅਨੁਸਾਰ ਸੁਰ ਅਤੇ ਤਾਲ ਦੇ ਅੰਦਰ ਕੀਤਾ ਜਾਂਦਾ ਹੈ ਉਸ ਦੀ ਮਹਿਮਾ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਯਾਦ ਰੱਖੋ ਸੁਰ ਹੈ ਦੇਵਤਾ ਅਸੁਰ ਬਸੁਰਾ ਅਸੁਰ ਦਾਇੰਤ ਹੈ ਸੁਰ ਦੇਵਤਾ ਹੈ ਅਸੁਰ ਦਾਇੰਤ ਹੈ ਇਸ ਕਰਕੇ ਸੁਰ ਦੇ ਅੰਦਰ ਜਿਸ ਕੀਰਤਨ ਹੁੰਦਾ ਹੈ ਤੇ ਉਹ ਦੇਵਤਿਆਂ ਦਾ ਹੀ ਦਰਬਾਰ ਹੁੰਦਾ ਹੈ ਇੰਨਾ ਸੁੰਦਰ ਕੀਰਤਨ ਸੁਣਨ ਤੋਂ ਬਾਅਦ ਹੌਸਲਾ ਤਾਂ ਨਹੀਂ ਪੈਂਦਾ ਕੀਰਤਨ ਕਰਨ ਦਾ ਸ਼ੌਕ ਹੈ ਅਤੇ ਆਪ ਮਾਨਵੀ ਬਖਸ਼ ਦੇ ਹੋ ਤੇ ਕੋਸ਼ਿਸ਼ ਮੇਰੀ ਹੁੰਦੀ ਆ ਕੋਈ ਨਵੀਂ ਤੋਂ ਨਵੀਂ ਚੀਜ਼ ਆਪ ਜੀ ਨੂੰ ਸਰਵਣ ਕਰਾਵਾ ਅੱਜ ਆਪ ਜੀ ਦੇ ਸਾਹਮਣੇ ਗੁਰਬਾਣੀ ਦੇ ਅੰਦਰ ਸਿੱਲੇ ਖੌਂਦਾ ਹੈ ਇੱਕ ਗੋੜੀ ਵੀ ਸੁਰਠੀ ਵੀ ਗੋੜੀ ਅਤੇ ਸੁਰਠ ਰਾਗ ਦੀ ਇੱਕ ਚੀਜ਼ ਆਪ ਜੀ ਆਪਜੀ ਸਾਹਮਣੇ ਪੇਸ਼ ਕਰਦਾ ਹਾਂ ਸ਼ਬਦ ਹੈ ਕਬੀਰ ਜੀ ਦਾ ਰੇ ਜੀ ਨਿਲਜ ਲਾਜ ਤੋਹੇ ਨਾਹੀਂ ਹਰ ਤਜ ਕਤ ਕਹੂ ਕੇ ਜਹੇ ਜਦੋਂ ਤੁਸੀਂ ਆਪਣਾ ਘਰ ਛੱਡ ਕੇ ਬਾਹਰ ਜਾਂਦੇ ਹੋ ਪਰਮਾਤਮਾ ਦੇ ਉੱਤੇ ਵਿਸ਼ਵਾਸ ਜੋ ਹੈ ਤੁਹਾਡਾ ਨਹੀਂ ਰਹਿੰਦਾ ਭਟਕਣਾ ਜ ਪੈ ਜਾਂਦੇ ਹੋ ਕਬੀਰ ਸਾਹਿਬ ਜੀ ਕਹਿੰਦੇ ਨਿਲਜ ਹੋ ਤੁਸੀਂ ਲਾਜ ਵਾਲੇ ਨਹੀਂ ਤਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਬੇਸ਼ਰਮਾ ਵਾਲਾ ਕੰਮ ਕਰਦੇ ਹੋ ਕਿਉਂਕਿ ਤੁਹਾਡੇ ਘਰ 'ਚ ਸਭ ਕੁਝ ਹੈ ਰੇ ਜੀਏ ਨਿਲਾਜ ਲਾਜ ਤੋਂ ਹੈ ਨਹੀਂ ਕਾਫੀ ਮਿਹਨਤ ਬਾਅਦ ਇਹ ਚੀਜ਼ ਤਿਆਰ ਕੀਤੀ ਹੈ ਤਾਂ ਆਪ ਸਰਵਣ ਕਰੋ ਈਏ ਨੇ ਲਾਜ ਲਾਜ ਤੋ ਹੈ ਨਾਹੀ ਰੇ ਜੀਏ ਨੇ ਲਾਜ ਲਾਜ ਤੋ ਰੇ ਜੀਏ ਨੇ ਲਾਜ ਲਾਜ ਤੋ ਹੈ ਨਾਹੀ ਤੋਹੇ ਨਾਹੀ ਰੇ ਜੀ ਨੇ ਲਾਜ ਲਾਜ ਤੋਹੇ ਨਾਹੀ ਹਾਰੇ ਤਾਜ ਕਤਕਾ ਹੂ ਕੇ ਜਾਈ ਐਤੋ ਸੋਰ ਉਠਾ ਹਰ ਤਜ ਕਤ ਕਾ ਹੂ ਕੇ ਜਾਈ ਹਰ ਤਜ ਕਤ ਕਾ ਹੂ ਕੇ ਜਾਈ ਰੇ ਦੀਏ ਨੇ ਲਾਜ ਲਾਜ ਤੋ ਹੈ ਨਾਹੀ ਤਤ ਕਾ ਤ ਕੇ ਜਾਈ ਹਰਤਾ ਜ ਕ ਤ ਕੇ ਜਾਈ ਰੇ ਜੀ ਲਾਜ ਲਾਜ ਤੋ ਹੈ ਨਾ ਜਾ ਕਟਾ ਕਰ ਉਚਾਈ ਜਾ ਕਟਾ ਕਰ ਉਚਾਈ ਸੋ ਪਰੇ ਕਰ ਜਤਨਾ ਸੋ ਹੀ ਪਰਕਾਰੇ ਜਾਤ ਨਾ ਸੋਹੀ ਸੋ ਪਰਕਾਰੇ ਜਾਤ ਨਾ ਸੋਹੀ ਸੋ ਪਰਕਾਰੇ ਜਾਤ ਨਾ ਸੋਹੀ ਰੇ ਜੀ ਅਨੇ ਲਾਜ ਲਾਜ ਤੋਹੇ ਨਾ ਦੇ <muchas> ਤੋ ਜਤੋ ਹੈ ਨਹੀਂ ਰੇ ਜੀਅ ਨੇ ਨਾਜ ਨਾਜ ਚਰਨ ਸਰਨ ਹੈ चरण चरण ਸਰਨ ਚਰਨ ਆਜ ਕੇ ਪਹੋਚਨ ਕਾ ਨਹੀ ਕਰਤਾ ਕੇ ਪਹੋਚਨ ਘਰ ਨਾਹੀ ਕਰਤਾ ਕੇ ਰੇ ਜੀ ਲਾਜ ਲਾਜ ਨਾਜ ਤੋ ਹੈ ਨਾ ਸਭ ਕੋ ਕਹੇ ਜਸ ਕੀ ਬਾਤਾ ਸਭ ਕੋ ਕਹੇ ਜਸ ਕੀ ਬਾਤਾ ਸਭ ਕੋ ਜਸ ਕੀ ਬਾਤਾ ਸੋ ਸਮਰਾਤ ਨੇ ਜਪਤ ਹੈ ਦਾਤਾ ਸਮਰਤ ਨਿਜ ਫਤ ਹੈ ਦਾਤਾ ਸੋ ਸਮਰਤ ਨਿਜ ਫਤ ਹੈ ਦਾਤਾ ਸੋ ਸਮਰਤ ਨਿਜ ਫਤ ਹੈ ਦਾਤਾ ਰੇ ਜੀ ਅਨੇ ਲਾਜ ਲਾਜ ਤੋ ਹੈ ਨਹੀਂ ਰੇ ਕਬੀਰ ਪੁਰਾਣਾ ਜਗ ਸੋਈ ਓਰ ਕੇ کے ہیرے دے اور نہ ہوئی جا کے ਜਿਏ ਨੀ ਲਾਜ ਰਾਜੇ ਤੋਂ ਇਹ ਨਹੀਂ ਹਰੇ ਤਜਕਤ ਕਾਬੂ ਕੇ ਜਾਈ ਹਰੇ ਤਜਕਤ ਕਾਬੂ ਕੇ ਜਾਈ ਜਿਏ ਨੀ ਲਾਜ ਰਾਜੇ ਤੋਂ ਇਹ ਨਹੀਂ ਜਿਏ ਨੀ ਲਾਜ ਰਾਜੇ ਤੋਂ ਇਹ ਰੇ ਜਿਏ ਲਾਜ ਰੇ ਜਿਏ ਲਾਜ ਰੇ ਜਿਏ ਰੇ ਜਿਏ